ਨਹਾਰੇ ਤੂੰ ਸਮਰਥ ਅਗੰਤ ਅਪਾਰੇ ਸਾਥ ਸਾਥ ਹੰਤ ਭੁਲਣਾ ਹੈ ਜੀਵ ਦਾ ਸਾਥ ਸਾਥ ਭੁਲਣਾ ਹੈ ਜਾਦੇ ਨਾਲ ਭੁੱਲ ਜਾਂਦਾ ਤੂੰ ਸਮਰਥ ਅਗੰਤ ਅਪਾਰੇ ਤੂੰ ਸਮਰਥ ਅਗੰਤ ਕਾਤੇ ਲਿਖੇ ਤੇਰੇ ਵਰਗਾ ਹੋਰ ਕੋਈ ਸੁਭਰਾਤ ਨਹੀਂ ਹੋਤਾ ਉਸਦੇ ਇਹ ਨਹੀਂ ਹੈਗਾ ਵੀ ਤੂੰ ਪਹਿਲੇ ਨੰਬਰ ਦਾ ਸੁਭਰਾਤ ਹੈ ਕੋਈ ਦੂਏ ਨੰਬਰ ਦਾ ਸੁਭਰਾਤ ਹੈ ਕੋਈ ਤੀਏ ਨੰਬਰ ਦਾ ਸੁਭਰਾਤ ਹੈ ਕੋ ਅੱਠਵੇਂ ਨੰਬਰ ਦਾ ਸੁਭਰਾਤ ਕੋਈ ਹੋ ਰਹੀ ਇਸ ਕੋਈ ਦੁਬਾਰੇ ਨਹੀਂ ਕੋਈ ਅਦਰ ਇਹ ਲੈ ਲੈ ਤੂੰ ਕੱਲ੍ਹਾਈ ਸੁਭਰਾਤ ਹੋ ਤੂਏ ਲੈ ਸਾਰੇ ਤੇਰਾ ਦੱਤਾ ਖੰਡਾ ਨੇ ਸੁਭਰਾਤ ਫੀ ਜੇ ਜਦ ਤੱਕ ਖਾਬੜੋ ਦੱਸ ਕਹੀਏ ਸਭਾ ਉਹ ਤਾਂ ਤੇਰੇ ਹੁਕਮ ਚ ਸਮਰਥਾ ਹੀ ਨਹੀਂ ਹੋ ਕਿਸੇ ਜਦ ਤੇ ਤੇ ਨਹੀਂ ਜਦ ਤੇ ਫਿਰ ਨੰਬਰ شمار ਕਿੱਥੋਂ ਆਊਗਾ ਅਗਣਾ ਤਾਂ ਗਣਤੀ ਤੋਂ ਪਰੇ ਜੇ 1 2 3 4 ਸਮਰਥ ਨੇ ਚੌਥੇ ਨੰਬਰ ਦਾ 8ਵੇਂ ਨੰਬਰ ਤੇ 2 ਭਾਈ ਹੈ ਜੀ 11ਵੇਂ ਨੰਬਰ ਤੇ ਆਈ ਕੋਈ ਦੂਜਾ ਹੈ ਨਹੀਂ ਇਹ ਲਈ ਜੀ ਆ ਜੀ ਸਭ ਕੱਟ ਗੱਲ ਕੁਝ ਹੋਰ ਕਹਿਤੀ ਕੱਟ ਤੇ ਸਾਰੇ ਹਲੋ ਤੇ ਕਹਿੰਦੇ ਪਿੱਛੇ ਵੀ ਤੂੰ ਗੱਲਦਾ ਹੈ ਇਹ ਬੁੱਧ ਰਣੀ ਕਹਿੰਦਾ ਹੈ ਗੱਲ ਇਹ ਸੋਲੋ ਸੋਲੋ ਸੋਲੋ ਇਹ ਬੁੱਧ ਰਣੀ ਕਹਿੰਦਾ ਅਗਣਤ ਨਵਿਸ ਨੂੰ ਬੋਲਦਾ ਅਗਣਤ ਆਧਿਕ ਹੈ ਜਿੰਨੀ ਆਏ ਸੁਖ ਦੇ ਅਧਿਕਾਏ ਦੇ ਅਧਿਕਾਏ ਬਾਕੀ ਸਭ ਜੰਤ ਦੇ ਇੱਕ ਤੋਂ ਦਾ ਐ ਬਾਈ ਜੀ ਤੇ ਜੱਤਾ ਕੇ ਬਸ ਬੇਸ਼ੱਕ ਜਿਹੜਾ ਅੱਖ ਨੂੰ ਦੀਦਾ ਦੇਤਾ ਆਈ ਇਹ ਸਭ ਜਾਣਦੇ 600 ਕ੍ਰਿਸ਼ਨ ਨੂੰ ਕਹਦਾ ਕਿ ਤੇ ਕ੍ਰਿਸ਼ਨ ਨੇ ਕੀਟ ਕੋਠੇ ਬਣਾਏ ਕੀਟ ਕੀੜਾ ਕ੍ਰਿਸ਼ਨ ਨੂੰ ਕੀਟ ਕਾਦੇ ਗਿਆ ਰਾਮ ਨੂੰ ਕੀਟ ਕਾਦੇ ਗਿਆ ਗਾਂਵੂ ਕੀਟ ਨਹੀਂ ਕਹਿੰਦੇ। ਹਾਂ। ਗਾਂਵੂ ਦਾ ਸਭਾ ਦਾ ਡਰਾਬੂ। ਤੇ ਇਸ ਨੂੰ ਕੀਟ ਕਹਿਣ ਦਾ ਮਤਲਬ ਹੈ ਕ੍ਰਿਸ਼ਨ ਦੇ ਧਾਰੀ ਹੈ, ਕ੍ਰਿਸ਼ਨ ਬਲ। ਐਵਰੀਆ ਭਾਗ ਦੇ ਵੀ ਕ੍ਰਿਸ਼ਨ ਜਿਹੜਾ ਕਾਲਾ ਬਦਲ ਹੈ ਉਹ ਕ੍ਰਿਸ਼ਨ ਕੀਟ ਕਹਿੰਦਾ ਨਾਲ। ਦਰੋਂ ਤਾਂ ਸ੍ਰੀ ਬਾਣੀ ਦੇ ਸਾਰੇ ਸਬੂਤ ਮਿਲ ਲੈਨੇ ਬਹੁਤ। ਐ ਜੋ ਨਹੀਂ ਬੜਦੇ ਸਾਰੇ। ਦੇਦ ਕਰਿਸ਼ਣ ਉਸੇ ਕੀਟ ਕੋਠੇ ਬਣੇ। ਕ੍ਰਿਸ਼ਨ ਕੀਟ ਹੈ। ਕੀਟ ਉਹ ਜਿਹੜਾ ਦੇਦਾਰੀ ਹੋ। ਰਾਮ ਕੀੜੀ। ਰਾਮ ਉਹਦਾ ਕੀਟ ਸੁਖਾ। ਜਿਹੜਾ ਹੈਗਾ ਸਾਰਾ ਦਾ ਪ੍ਰਾਤਮਿਕ ਉਹਨਾਂ ਨੂੰ। ਪ੍ਰਭ ਕਹਿ ਲੋ। ਉਹਦੇ ਵਾਸਤੇ ਰਾਮ ਵਰਤਿਆ ਹੈ। ਜਿਹੜਾ ਜਨਮ ਲੈਂਦਾ ਸਰੀਰ ਚ ਆਉਂਦਾ ਉਹਦੇ ਵਾਸਤੇ ਕ੍ਰਿਸ਼ਨ। ਮਰ ਕਾਲਾ ਇਹ ਸਾਰੀ ਬਾਇਓਲੋਜੀ ਬਦਲ ਜਾਂਦੀ ਹੈ ਤਾਂ ਦੁਰੰਤ ਅਰ ਇਹ ਕੀਟ ਕੀ ਕੋਈ ਲਿਖ ਸਕਦਾ ਹੈ ਕਿਦੂਆ ਕੀਟ ਕੋਈ ਪਤਾ ਨਹੀਂ ਲੱਗਦਾ ਸਵਾਇਦਾ ਸਰਪਾਸ਼ਾ ਪੁੱਟ ਕੇ ਬਾਹਰ ਦੁੱਧ ਅਗਲੇ ਕੀਟ ਲੱਗਦਾ ਕੀਟ ਉਸ ਵਾਸਤੇ ਸਾਧ ਜਾਈ ਚਾਹੀਦੀ ਦੇਖੋ ਕਿਹੜਾ ਕਮੇਲੀ ਹੁਲੂਗਾ ਕੀੜ ਤਸ ਪਾਸ਼ਾ ਨੂੰ ਕਹਿੰਦੇ ਫਲੱਡ ਕਮੇਲੀ ਬਾੜੀ ਐ ਤੇ ਮੁਝੇ ਕਮੇਲੀ ਬਾੜੀ ਦਿੰਦਾ ਅਗਲੇ ਸਾਰਿਆਂ ਦੇ ਜਿਹੜੇ ਲੱਗੀ ਲੱਗੀ ਹੋ ਜੇ ਹੋ ਕੀ ਆ ਈ ਲਉਂਦੇ ਸੀ ਉਹ ਤਾਜ ਦਾ ਬਲਦਰੀ ਦੀ ਕੱਲ ਕੀ ਲਉਂਦੇ ਸੀ ਆਇਤਾ ਹਨੀਗਰ ਜੀ ਉਹਦੇ ਸੱਤੇ ਕਲਗੀ ਆ ਦਸਤਾਵੇਜ਼ ਕਲਗੀ ਆ ਉਹ ਸਾਰੇ ਸਾਰੇ ਲਾਉਂਦੇ ਤੇ ਐਸੇ ਕਲਗੀ ਵੀ ਨਹੀਂ ਦਿਖਾਈ ਤੇ ਅੰਗਰੇਜ਼ਾਂ ਦੀ ਜਿਹੜੀ ਫੋਟੋ ਉਹ ਨਹੀਂ ਮੁੰਡਾ ਰਣਜੀਤ ਸਿੰਘ ਦਾ ਉਹ ਨਹੀਂ ਦਿਖਾਈ ਮਰਾਠੇ ਦੀਆਂ ਸ਼ਿਵਾਜੀ ਮਰਾਠੇ ਲੱਗੀ ਹੋਈ ਹੈ ਕਹਿੰਦਾ ਵੀ ਹਜੂਰ ਸਾਹਿਬ ਤੂੰ ਐ ਪਹਿਲਾਂ ਖੜਾ ਨਾਲ ਉਹ ਦਸਮਤ ਸੌਰੀ ਜੀ ਤਾਂ ਸਪਾਈ ਦਾ ਨਹੀਂ ਫੋਟੋ ਦੀ ਗੱਲ ਕਰਦਾ ਨਹੀਂ ਨਹੀਂ ਨਹੀਂ ਜੇ ਜੇ ਕੋਈ ਸਮਝੀ ਜੇ ਜੇ ਟਾਈਮ ਹੋਈ ਜਾਣਾ ਆਉਦੇ ਪਰ ਨਹੀਂ ਉਹਦੇ ਚ ਆਈ ਨਹੀਂ ਕੋਈ ਜਨੂ ਖੜਾ ਪਿਛਲੇ ਪਾਸੇ ਲੈ ਗੋ ਮੈਡ ਫੋਟੋ ਆ ਬਿਲਕੁਲ ਸੈਂਟ ਪੜਾ ਆ ਤੁਹਾਡੀ ਦਵੀ ਹੋਈ ਹੈ ਪਤਾ ਨਹੀਂ ਜਦ ਇਥੇ ਇਹਨਾਂ ਨੇ ਅੰਗਰੇਜ਼ਾਂ ਨਾਲ ਕੀਤੀ ਹੈ ਰਵੀ ਲੱਗੀ ਉਹ ਤਾਂ ਦਈ ਨਾ ਹੀ ਪਰ ਉਥੇ ਨਾ ਉਥੇ ਤਾਂ ਲੋੜੀ ਚਾਹੀਦੀ ਸੀ ਰੋਪਣ ਵਾਲੀ ਉਹ ਵੀ ਤਾਂ ਗੱਲ ਹੈ ਜੀ ਉਥੇ ਖਾਸ ਕਰਕੇ ਲੱਗਣੀ ਚਾਹੀਦੀ ਉਥੇ ਕੋਈ ਨਹੀਂ ਕਿ ਫੋਟੋ ਵਾਲੇ ਨਵਾਈ ਉਹ ਕਿਹੜਾ ਫੋਟੋ ਕੈਮਰਾ ਲਈ ਨਹੀਂ ਉਹ ਕੈਮਰਾ ਲਈ ਅੱਛਾ ਉਹ ਹੋ ਰਿਹਾ ਹੈ ਉਹਦਾ ਜਿਹੜੀ ਦੁਨੀਆ ਫੋਟੋ ਉਹ ਦੇਦੇ ਆ ਬਹੁਤ ਫਰਕ ਆ ਅੱਛਾ ਉਹ ਕਰ ਰਹੇ ਨੇ ਉਹ ਵਾਸਤੇ ਜੀ ਫੋਟੋ ਦੇ ਪਾ ਤੁਸੀਂ ਜਿਹੜੇ ਕੈਮਰੇ ਨਾਲ ਲਈ ਹੋ ਜਾਂ ਹਾਂ ਲੈ ਇੱਕ ਮਿੰਟ ਕੋ ਚੱਲ ਆ ਦੋ ਆਊਟ ਦਾ ਬਹੁਤ ਫਰਕ ਆ ਜਿੱਦਾਂ ਤੋਂ ਬਹੁਤ ਫਰਕ ਆ ਮੈਂ ਦੇਖੀ ਰਿਹਾ ਹਾਂ ਸਿੰਪਲ ਨਹੀਂ ਕਰ ਬੰਨੀ ਹੈ ਇਹ ਜੀ ਵਿਚਾਰੇ ਬੈਠਾ ਹੈ ਨਰਵਲੇ ਪਿਛਲੇ ਪਾਸੇ ਖੜਾ ਪਾਰਾ ਅੱਛਾ ਉਹ ਤਾਂ ਲੱਗਦੇ ਨਹੀਂ ਤੂੰ ਆਹ ਉਹਨਾਂ ਦੇ ਗੱਲ ਰੂਗਾ ਰਜੀਵ ਸਿੰਘ ਹੈ ਤਾਂ ਕੋਈ ਬੰਦਾ ਜੋ ਤਾਂ ਅਜੀਪਕ ਉਹਦੀ ਦੂਰ ਅਜੀਪਕ ਉਹ ਨਹੀਂ ਆਖਰ ਵੀ ਧੜੀ ਹੈ ਹੁਣ ਤਾਂ ਧੜੀ ਹੈ ਸਿੱਧੀ ਜਿਹੀ ਦਿਖਾਈ ਜਾਂਦੀ ਫੋਟੋਆਂ ਦਾ ਹੁੰਦਾ ਟੌਰ ਜੀ ਦਿਖਾਉਂਦੇ ਨਾ ਬਣਾ ਕੇ ਅੱਛਾ ਅੱਛਾ ਇਹ ਬੜਾ ਸਾਰੀ ਇਮੇਜਿਨੇਸ਼ਨ ਹੈ ਉਹਦਾ ਜ਼ਾਇਰਾ ਤਾਰੂ ਕੋਈ ਗਿਆ ਉਸ ਮਾਰ ਕੇ ਬਖਵਦੀ ਹੋਣੀ ਸ਼ਰਨ ਪਰੇ ਕੀ ਆਜਾ ਦੇ ਡੋਬ ਤੋਂ ਬਲੈਕ ਮੈਨ ਚੰਗੀ ਤਰ੍ਹਾਂ ਬੈਠੇ ਨੇ ਵਧੀਆ ਇਹਨਾਂ ਦੇਖੋ ਸ਼ਰਨ ਪਰੇ ਕੀ ਰਾਖ ਦੇ ਅੱਲਾ ਨਾਮ ਤੇ ਤੋਰੇ ਜਿਹੜਾ ਤੇਰੀ ਹੁਣ ਕੁਦਰਤ ਰੱਖਦਾ ਬਦਲਣਾ ਰੱਖੀ ਕਰ ਦੇ ਜੋ ਮੇ ਰੱਖਿਆ ਦੇ ਅਸਰ ਰੱਖਿਆ ਉਹ ਹੈ ਨਾ ਸਾਰੀ ਰੱਖਿਆ ਦਾ ਨਾਨਕ ਤੁਮਰੇ ਬਾਲ ਨੂੰ ਬੰਦਾ ਦਾ ਕਹਿੰਦਾ ਤੁਮਰੇ ਬਾਲ ਨੂੰ ਬਾਲਾ ਨਾਨਕ ਤੁਮਰੇ ਜੀ ਨੂੰ ਇਹਦਾ ਕਿਹਾ ਉਹ ਬਾਲਾ ਗੋਲ ਜੀ ਦਾ ਬਾਲ ਕਬਾਲਾ ਕੀ ਨਾ ਆ ਭਰਦੀ ਆ ਮੰਗਦੀ ਨੂੰ ਇਹ ਖਾ ਗਏ ਬਸ ਹਾਂ ਬਾਲਕਵਾ ਲਗੀਦਾ ਨਾ ਸਰਗਰ ਬਾਲਕ ਲਾਲਾ ਗੋਲਾ ਕੀਦਾ ਹੈ ਕੀਦਾ ਖਰੀਦ ਗੁਲਾਮ ਕੀਦਾ ਕੀਦਾ